ਉਹ ਨਿਆ ਖੇਡਾ ਕੋ ਜਾ ਲੈ ਉਹ ਕੀ ਸਿਫਤ ਕਰਾਂ ਗੁਰ ਤੇਰੀ ਉਹ ਤੇਰੇ ਚੋ ਜ ਕੀ ਸੁਤ ਕਾ ਵਗਤ ਉਹ ਬੀਬੀ ਨੇ ਚਾਬੀ ਕੱਢੀ ਆ ਖੋਲਿਆ ਉਹਦੇ ਚ ਕੀ ਵੇਖਿਆ ਕਿ ਜੋ ਮੈਂ ਧਰਿਆ ਸੀ ਉਹ ਹੈ ਨਹੀਂ ਉਹ ਚਾਬੀ ਕੱਢ ਕੇ ਜਦੋਂ ਵੇਖਿਆ ਤਾਂ ਉਹ ਇਸ ਤਰ੍ਹਾਂ ਬੈਠੀ ਮੇਰੇ ਪਿੱਛੇ ਉੱਡ ਗਈ ਨਹੀਂ ਪਈ ਉਹ ਬੜੀ ਹੈਰਾਨ ਪਰੇਸ਼ਾਨ ਆਂਦੀ ਹੈ ਪੈਣ ਸੌਰ ਨੂੰ ਕੀ ਬਣਿਆ ਮੈਂ ਤਾਂ ਬੜਾ ਖੁਸ਼ ਪਾਇਆ ਸੀ ਵਿੱਚ ਸੱਚੇ ਪਾਛਾ ਫਿਰ ਨਾਲੇ ਜਲਪਣੀ ਛੱਕੀ ਜਾਂਦੇ ਨੇ ਪਰ ਉਹਦੀ ਚੀਜ਼ ਕੋਈ ਰੱਖੀ ਵਿੱਚ ਜਲਪਣੀ ਛੱਕੀ ਜਾਂਦੇ ਫਿਰ ਘੜੀ ਘੜੀ ਹੁਕਮ ਹੁੰਦਾ ਮਸਤਾਨੀਆਂ ਲਿਆ ਫਿਰ ਕੀ ਲਿਆਈ ਸ ਉਹ ਮਸਤਾਨੀ ਕਿੱਥੋਂ ਲਿਆਵੇ ਉਹ ਆਂਦੇ ਨੇ ਕੀ ਕਰਦਾ ਮੋਢੋਂ ਕਰਦਾ ਰਿਓ ਸ਼ਾਮਾਂ ਚੋਰੀ ਆਵੇ ਆ ਫਿਰ ਜਿਸ ਵਕਤ ਇਹ ਕੁਝ ਖੇਡ ਵਰਦੀ ਕੋਲ ਸੀ ਬੈਠੇ ਸਾਡੇ ਮਨ ਬੜੇ ਖੁਸ਼ ਸੀ ਵੀ ਹਸਤੀਆਂ ਰਹੀਆਂ ਜਿਸ ਤਰ੍ਹਾਂ ਬੈਠੀਆਂ ਸੀ ਵੀ ਬਣਿਆ ਕੀ ਕੌਣ ਲੈ ਗਿਆ ਸੱਚੇ ਪਾਸ਼ਾ ਨੂੰ ਕਰਦੇ ਨੇ ਪਤਾ ਨਹੀਂ ਲੱਗਾ ਕਿਹੜਾ ਚੋਰ ਪਿਆ ਕਾਹ ਮਦਰ ਬਜਨ ਬਲਾਸ ਹੁੰਦੇ ਆ ਤੇ ਅੰਦੇ ਨੇ ਫੈਸਲਾ ਹੁਣ ਕੌਣ ਕਰੇਗਾ ਹੁਣ ਆਖੋ ਤੇ ਨਾਂ ਲਵਾ ਆਖੋ ਤੇ ਨਾਂ ਲਵਾ ਕੌਣ ਫੈਸਲਾ ਕਰੇਗਾ ਇਹ ਮਹਾਰਾਜ ਫੈਸਲਾ ਕਰਨਗੇ ਸਵੇਰੇ ਆਕੇ ਹੁਣ ਤੇ ਮਹਾਰਾਜ ਇੱਥੇ ਨਹੀਂ ਸਵੇਰੇ ਫੈਸਲਾ ਕਰੇਗਾ ਬਾਅਦ ਤੋਂ ਮੁਗਰੋਂ ਫੈਸਲਾ ਆਵੇਗਾ ਯੋ ਬਚਨ ਬਲਾਸ ਹੁੰਦਿਆਂ ਦੇ ਮਾਤਾ ਜੀ ਹੁਕਮ ਅਰਜ ਕਰ ਦਿੱਤੀ ਸੱਚੇ ਪਾਤਸ਼ਾਹ ਆਪ ਜੀ ਬਿਨਾਂ ਕੋਈ ਨਹੀਂ ਹੈਗਾ ਆਖਿਆ ਹੋਰ ਕੋਈ ਨਹੀਂ ਕਰ ਸਕਦਾ ਇਹਨਾਂ ਬਚਨ ਨੂੰ ਚੌਂਕੀ ਦਾ ਮਾਰ ਕੇ ਸੱਚੇ ਪਾ ਚਲੇ ਗਏ ਨੇ ਰਾਤ ਲੰਘੀਆ ਸਵੇਰ ਹੋਈਆ ਆਸਾ ਦੀ ਬਾਤ ਗਏ ਸੱਚੇ ਪਾਸ਼ਾ ਸੰ ਮਸਤਾਨ ਵਾਪਸ ਆਏ ਨੇ ਇਸ ਤਰ੍ਹਾਂ ਹੀ ਕਾਫੀ ਸਾ ਸੰਗਤ ਨਾਲ ਆ ਮਹਾਰਾਜ ਜੀ ਨਾਲ ਨੇ ਤੇ ਫਿਰ ਉੱਥੇ ਜਿੱਥੇ ਉਹ ਇਹ ਕੋਤਕ ਹੋਇਆ ਉੱਥੇ ਥੱਲੇ ਉੱਤੇ ਜਵਾਰੇ ਉੱਥੇ ਥੱਲੇ ਸੱਚੇ ਫਾਇਖ ਲੋਤੇ ਖੂਬ ਸੀ ਫੋ ਦੇਖ ਲੋਤੇ ਆਂਦੇ ਨੇ ਮਹਾਰਾਜ ਜੀ ਰਾਤ ਕਿਚੋਰੀ ਹੋਈ ਆਖੇ ਉਹ ਪਤਾ ਨਹੀਂ ਕਰ ਆ ਤੇ ਇਹ ਫੈਸਲਾ ਤੁਸਾਂ ਕਰਨਾ ਤੇ ਜਿਸ ਤਰ੍ਹਾਂ ਮਾਤਾ ਜੀ ਨੇ ਅਰ지 ਕੀਤੀ ਉਸ ਤਰੀ ਮਹਾਰਾਜ ਜੀ ਵਰਜ ਕੀਤੇ ਨੇ ਤੁਹਾਡੇ ਬਿਗਾਰੇ ਕੌਣ ਉੱਥੇ ਫਿਰ ਜੰਕਾਰੇ ਕਿਨੇ ਬੋਲੇ ਇਸੋਨਾਲ ਜੰਕਾਰਿਆਂ ਦੇ ਨਾਲ ਫਿਰ ਮਸਤਾਨਗੜ ਗੂੰਜ ਉੱਠਿਆ ਕਿ ਉਹ ਕੀ ਸਿਫਤ ਕਰਾਂ ਗੁਰ ਤੇਰੀ ਵੇ ਤੇਰੇ ਜੋ ਜਨਿਆਰੇ ਨੇ ਬਾਦ ਫੇਰ ਇਹ ਬੀਬੀ ਮਸਤਾਨੀ ਜਿਹੜੀ ਰਵਾਲਸਾ ਰਹਿੰਦੀ ਸੀ ਤੇ ਆਏ ਮੰਡੇ ਸੇ ਗਏ ਆ ਅਰਜ਼ ਕਰਨ ਵਾਸਤੇ ਸੱਚੇ ਪਾਤਸ਼ਾਹ ਮੈਂ ਲੰਗਰ ਕਰਨ ਆ ਵੀ ਪਰ ਮੈਂ ਚਾਰ ਲੰਗਰ ਆਖੇ ਨੇ ਆਪ ਜੀ ਦੇ ਦੇਣ ਦੇ ਦਾ ਸਾਰੇ ਚਲੇ ਗਏ ਆ ਚਲੇ ਗਏ ਕਿ ਜਾਂਦੇ ਲੰਗਰ ਛਕਾ ਸੱਚੇ ਪਾਜਾ ਕਿੱਥੇ ਲੰਗਰ ਇੱਕ ਛਕਦੇ ਤੋਂ ਉਸ ਵੇਲੇ ਹੁਣ ਤਾਂ ਦੋ ਟਾਈਮ ਛਕਦੇ ਨੇ ਉਦੋਂ ਇੱਕ ਟਾਈਮ ਛਕਦੇ ਸੀ ਜੰਦੇ ਲੰਗਰ ਸ਼ਕਿਆ ਇੱਕ ਦੁਪਹਿਰ ਦਾ ਲੰਗਰ ਸ਼ਕਿਆ ਇੱਕ ਫੇਰ ਤਿੰਨ ਚਾਰ ਕੋਈ ਨੇ ਫੇਰ ਚੱਲਿਆ ਮੁਕੇ ਤਿੰਨ ਚਾਰ ਵੀ ਤੋਂ ਬਾਅਦ ਸਾਨੂੰ ਪਤਾ ਸੀ ਕਿ ਸੱਚੇ ਪਾਤਸ਼ਾਹ ਕਿੰਤੀ ਸਰ ਜਾਣਾ ਤੇ ਅਸੀਂ ਨਹੀਂ ਜਾਣਾ ਅਸੀਂ ਦੋ ਤਿੰਨ ਜਣੀਆਂ ਸਾਂ ਜਿਨ੍ਹਾਂ ਦੇ ਮਨ ਸੀ ਇਹ ਚੋਰ ਸੀ ਵੀ ਅਸੀਂ ਨਹੀਂ ਜਾਣੇ ਜਿੱਥੇ ਬੈਠੇ ਰਹੇ ਥੱਲੇ ਤੇ ਸਾਨੂੰ ਹੁਕਮ ਹੋ ਜਾਣਾ ਤੇ ਆਪਾਂ ਉਹਨਾਂ ਦੇ ਘਰ ਛੋਟਾ ਸੀ ਆਪਾਂ ਉਹ ਤੇ ਗੱਡੀ 'ਚ ਗੱਡੀ ਜਾ ਕੇ ਬਹਿ ਗਏ ਤੇ ਸੱਚੇ ਪਾਤਸ਼ਾਹ ਆਪਾਂ ਗੱਲਾਂ ਹੀ ਕਰਨੀਆਂ ਬੜੀ ਦੂਰ ਆ ਕਿਸ ਤਰ੍ਹਾਂ ਚੜਾਂਗੇ ਤੇ ਸੱਚੇ ਪਾਤਸ਼ਾਹ ਆ ਗਏ ਉਪਰ ਕਟ-ਕਟ ਕੇ ਜਾਣਨ ਉਹ ਕਟ-ਕਟ ਜਾਂਦਾ ਅਸੀਂ ਆਨੇ ਸ ਉਹਨਾਂ ਦੇ ਪਿੱਛੇ ਕੰਮ ਕਰ ਲਿਆ ਪਰ ਉਹ ਸਭ ਦੇ ਅੰਤ ਜਾਣਦੇ ਉਹ ਸਭ ਦੇ ਦਿਲਾਂ ਦੀਆਂ ਜਾਣੇ ਉਹ ਰਾਮ ਕੋਈ ਅਜਾਣਾ ਨਹੀਂ ਹੋ ਕਈਆਂ ਨਾ ਨਈਆਂ ਰਾਮ ਕੋਈਆਂ ਨਾ ਨਈਆਂ ਰਾਮ ਕੋਈਆਂ ਨਾ ਨਈਆਂ ਸਭ ਦੇ ਦਿਲਾ ਦੀਆਂ ਜਾਨੇ ਤੇ ਰਾਮ ਕੋਈਆਂ ਨਾ ਨਈਆਂ ਸਭ ਦੇ ਦਿਲਾ ਦੀਆਂ ਜਾਨੇ ਨਾ ਨਈਆਂ ਸੱਚੇ ਪਾਸ਼ਾ ਕੇ ਸਾਡੇ ਤਿੰਨਾਂ ਦੇ ਨਾਮ ਲੈ ਕੇ ਤੇ ਹੁਕਮ ਹੋਇਆ ਕਿ ਕੁੰਤੀ ਸਰ ਜਾਣਾ ਉਹਨੋ ਟੇਕੀਸਤਰਾ ਨਾ ਕਰਤ ਸਾਈਆਂ ਸਸੇ ਪਤਾ ਵੀ ਸੀ ਦੂਰ ਬੜੀ ਐ ਸੜਕੋ ਚੜਾਈ ਚੜਿੰ ਜਾਣੀ ਚਲ ਹੁਕਮ ਮੰਨ ਕੇ ਅਸੀਂ ਚਲੇ ਗਏ ਆਥੇ ਚਲੀਆਂ ਗਈਆਂ ਜਾਣ ਤੋਂ ਪਹਿਲਾਂ ਇੱਕ ਪਹਾੜਨ ਬੀਬੀ ਸੀ ਚੂੜੀਆਂ ਪਾਈਆਂ ਸਲਵਾਰ ਪਾਈ ਵਸੇ ਭਾਜਨ ਪੁੱਛਿਆ ਸੋਨੇ ਉਹ ਸੱਚ ਮਹਾਰਾਜ ਸੱਚੇ ਪਾਛਾ ਵਸੇ ਦਹੀਂ ਲਾਈ ਆ ਇਹ ਸਾਡੀ ਮੇਰੀ ਅੱਖੀ ਵੇਖਿਆ ਦੀ ਗੱਲਾਂ ਨੇ ਮੈਂ ਤਾਂ ਅਰਜ਼ ਕਰਦੀਆਂ ਜਦੋਂ ਦਹੀਂ ਲੈ ਕੇ ਆਈਆ ਤਾਂ ਗੋ ਮਾਤਾ ਜੀ ਨੇ ਫੜ ਲੈ ਲਈ ਆਂਦੇ ਮਾਤਾ ਜੀ ਆਂਦੇ ਨੇ ਕਿ ਸੱਚੇ ਪਾਛਾ ਬਰਾਜੇ ਨੇ ਅੰਨੇ ਮਾਤਾ ਜੀ ਬਰਾਜੇ ਨੇ ਤੇ ਇਹ ਇਦਾਂ ਹੀ ਇਸ ਤਰੀਕੇ ਰੱਖਿਓ ਜੇ ਇਹਨੂੰ ਖੋਲਿਆ ਨਾ ਰਮਾਲੀ ਨਾ ਖੋਲਿਓ ਤੋ ਇਹ ਸੱਚੇ ਪਾਤਸ਼ਾਹ ਰਮਾਲੀ ਖੋਲਣਗੇ। ਨਹੀਂ ਰੱਖ ਦਿੱਤਾ ਜਦੋਂ 29ਰ ਤੋਂ ਵਾਪਸ ਆਇਆ ਸੀ। ਫੇਰ ਹੁਕਮ ਆਇਆ ਪਕੌੜੇ ਕੱਢੋ। ਚੱਲੋ ਅਸੀਂ ਲੱਗ ਪਈਆਂ ਪਕੌੜੇ ਪਕੌੜੇ ਕੱਢਣ। ਛੱਕਦੇ ਰਹੇ ਨੇ ਮਾਤਾ ਜੀ ਨਾ ਉਹ ਲੈ ਮਿੱਟੀ ਦਾ ਭਾਂਡਾ ਛੋਟਾ ਜਿਹਾ ਆਂਦੇ ਨੇ ਸੱਚੇ ਪਾਤਸ਼ਾਹ। ਆਏ ਕਿ ਬਿੱਲੀ ਆਈ ਸੀ ਪਾਰ ਨਾ ਕਿ ਦੇਜਾ ਆਵਜੀ ਵਾਸਤੇ। ਰੱਖ ਦਿੱਤਾ। ਇਹ ਵੀ ਅਰ지 ਕੀਤੀ ਸੱਚੇ ਪਾਤਸ਼ਾਹੇ ਆਸਾਨੀ ਖੁੱਲਣਾ ਆਪ ਜੀ ਨੇ ਖੁੱਲਣਾ ਹੁਣ ਸੱਚੇ ਪਾਤਸ਼ਾਹੇ ਕਿ ਨਹੀਂ ਖੋਲ ਦੇਤੇ ਮਾਤਾ ਜੀ ਅਰਜ਼ ਕੀਤੀ ਸੱਚੇ ਪਾਤਸ਼ਾਹ ਸਾਖ ਤਾਂ ਲੈਣਾ ਸੰਗਦੇ ਕਿਉਂ ਇਸੇ ਤਰ੍ਹਾਂ ਤੁਹਾਨੂੰ ਪਤਾ ਵੀ ਬਿਦਰ ਦੇ ਘਰ ਕ੍ਰਿਸ਼ਨ ਜੀ ਗਏ ਵੀ ਬਿਦਰਾਨੀ ਨੇ ਪ੍ਰੇਮ ਨਾਲ ਕੀ ਖਵਾਇਆ ਸੀ ਉਹਨਾਂ ਨੇ ਪਹਿਲੇ ਛਿੱਲਾਂ ਖੋਣੀਆਂ ਸੀ ਤੇ ਗਨੀਆਂ ਸੋੜਦੀ ਰਹੀ ਬਿਦਰ ਆਂਦਾ ਤੂੰ ਕੀ ਕਰਨ ਰਹੀ ਹੈ ਮੈਂ ਹੁਣ ਰੋਟੀ ਮੈਂ ਬਣਾਵਾਂਗਾ ਪ੍ਰਸ਼ਾਦਾ ਮੈਂ ਕਰਾਂਗਾ ਉਹਨੇ ਮੈਂ ਲੂਣਾ ਸਾਗ ਬਣਾ ਲਿਆ ਦਸੋ ਜੋ ਪ੍ਰੇਮ ਨਾਲ ਲਿਆਂਦਾ ਕੀ ਹੁੰਦੇ ਨੇ ਉਹ ਕੇਲੇ ਦੇ ਛਿਲਕੇ ਖਾਵੇ ਨਾ ਸ਼ਰਮਾਵੇ ਭੁੱਖਾ ਪਿਆਰ ਦਾ ਤੇ ਲੇਦੇ ਛਿਲਕੇ ਖਾਵੇ ਸਤਿ ਸ੍ਰੀ ਅਕਾਲ ਮਾਤਾ ਜੀ ਅਰਜ ਕਰੇ ਸੱਚੇ ਪਾਤਸ਼ਾਹ ਆਪ ਤੇ ਸਾਡੇ ਕੋ ਆ ਕੇ ਇਹਦੀਆਂ ਟੁਕੜੀਆਂ ਕਰਕੇ ਦੀ ਮੇਰੇ ਪਕੌੜੇ ਕੱਢ ਕੇ ਦੀ ਉਹ ਦੇਖੋ ਕਿੰਡੀ ਬੀਬੀ ਪ੍ਰੇਮਣ ਹੋਵੇਗੀ ਕਿੰਦੇ ਪਿਆਰ ਨਾਲ ਉਹ ਦਹੀਂ ਲੈ ਕੇ ਆਈ ਸੀ ਤੇ ਸੱਚੇ ਪਾਤਸ਼ਾਹ ਉਹਨਾਂ ਨੇ ਸ਼ਿਕਾਇਆ ਸੀ ਸੋ ਸਤਿਗੁਰਾਂ ਦੀਆਂ ਤੇ ਕੌਤਕ ਬੜੇ ਨੇ ਸਾਂ ਛੋਟੇ ਤੇ ਆਪ ਜੀ ਲਾਹ ਕਿ ਲੋਣਾ ਤੇ ਜਾਏ ਕੁੱਲ ਤੇ ਪ੍ਰਗਟ ਹੋਏ ਤਾਹੀ ਕੁੱਲ ਕੋ ਨਾਮ ਜਾਏ ਤੇ ਪ੍ਰਗਟ ਹੋਏ ਤਾਹੀ ਕੁੱਲ ਕੋ ਨਾਮ ਜਾਏ